ਜਦੋਂ ਹੁਣ ਸੱਚੇ ਬਾਦਸ਼ਾਹ ਵਜਨ ਮਰਾਦ ਕਰਕੇ ਤੇ ਲੱਗੇ ਉਹ ਨਜ਼ਾਰਾ ਪਿਛਾ ਨੂੰ ਖਿੱਚਣ ਤੇ ਫਿਰ ਰੋਣ ਡੇ ਆਖਣ ਲੱਗੇ ਮੈਨੂੰ ਜਾਂ ਤੇ ਦੱਸ ਜਾ ਕੋਈ ਜਣ ਸੱਚੇ ਬਾਦਸ਼ਾਹ ਆਖਿਆ ਤੂੰ ਇੰਜ ਕਰ ਇਸ ਤਰ੍ਹਾਂ ਬੇਦਾਨਾ ਕਰਿਆ ਕਰ ਮੈਂ ਦੁਆਲੀ ਤੇ ਅੰਮ੍ਰਿਤਸਰ ਆਉਂ ਹਰਮੰਦਰ ਸਾਹਿਬ ਉੱਥੇ ਆ ਕੇ ਮੈਨੂੰ ਮਿਲ ਲਵੀਂ ਮੈਨੂੰ ਬੇਦਾਨਾ ਨਾ ਕਰਿਆ ਕਰ ਚੈਨ ਨਹੀਂ ਕਰ ਦਿੰਦੇ ਜਦੋਂ ਤੁਹਾਡੀ ਇਹ ਹੂ ਕੋਥੋਂ ਦਾ ਅਪੜਦੀ ਆ ਮੇਰੀ ਹਿੰਮਤ ਨਹੀਂ ਪੈਂਦੀ ਮੈਂ ਕੋਈ ਠਹਿਰ ਸਕਾਂ ਇਹੋਈ ਦੁਆੜੀ ਦਾ ਦਿਨ ਸੀ ਬਾਬੇ ਜੀ ਨੂੰ ਸੁਣੀ ਸਰੀਆਲੀ ਆਲੇ ਫਿਰ ਅੰਮ੍ਰਿਤਸਰ ਜਾ ਹਰਿਮੰਦਰ ਸਾਹਿਬ ਇੱਕ ਦਿਨ ਤੋਂ ਕਈ ਦਿਨ ਪਹਿਲਾਂ ਬਹਿ ਗਏ ਤੇ ਇਹਨਾਂ ਨੇ ਸੀ ਜਦੋਂ ਸਹਿਵਾ ਦਰਸ਼ਨ ਦਿੱਤਾ ਸੀ ਮੈਂ ਸੱਜੇ ਰੋਗ ਦੀਆਂ ਕਰਕੇ ਆਉਂ ਜਦੋਂ ਦੁਆੜੀ ਵਾਲਾ ਦਿਨ ਆਇਆ ਇਥੇ ਤਾਂ ਦੇ ਬਾਬੇ ਜੂਨ ਸੂਹੀ ਬੈਠੇ ਤੇ ਫਿਰ ਜਾੜ-ਜਾੜ ਰੋਈ ਜਾਂਣ ਆਪਣੀ ਆਪ ਦੀ ਸੁਧ-ਬੁੱਧ ਭੁੱਲ ਗਈ ਕਿ ਤੇਰੀ ਯਾਦ ਚ ਮੈਂ ਬੜਿਆਂ ਅੰਦਰਾਂ ਦਾ ਬੈਠਾ ਤੂੰ ਅਜੇ ਤੱਕ ਨਹੀਂ ਆਇਆ ਇਹਨਾਂ ਮੁਲਖ ਨੰਗੀ ਜਾਂਦਾ ਆ ਮੇਰੀ ਨਜ਼ਰ ਅੱਗੇ ਕੋਈ ਨਹੀਂ ਆਉਂਦਾ ਮੈਂ ਤੇਰਾ ਦਰਸ਼ਨ ਕਰਨਾ ਹੈ ਰਾਮ ਸਿੰਘ ਮਹਾਰਾਜ ਇੱਕ ਸਾਦਾ ਰੂਪ ਧਾਰਿਆ ਆ ਦੇ ਤਰੇ ਕਿਉਂ ਕਰਕੇ ਕਿ ਪਾਇਆ ਤੇ ਫਿਰ ਕੋਲ ਆ ਕੇ ਆਂਦਿਆ ਤੂੰ ਮੇਰਾ ਦਰਸ਼ਨ ਕਰਨ ਬਦਲੇ ਬੈਠਾ ਬਾਗੈ ਜੀ ਹੁਣ ਸੁਣੀ ਆਂੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰ ਬਾਬੇ ਜੀ ਹੁਣ ਸੁਣੀਂ ਸਰੀਆਲੀ ਵਾਲੇ ਕਈ ਵਾਰੀ ਸਹਿਬਾਂ ਦਾ ਸਤਿਗੁਰੂ ਰਾਮ ਸਿੰਘ ਜੀ ਉੱਚੀ ਉੱਚੀ ਰੋਈ ਜਾਣਾ ਤੇ ਫਿਰ ਰੋਂਦਿਆਂ ਰੋਂਦਿਆਂ ਆਪਣੇ ਆਪ ਦੀ ਸੁਧ-ਬੋਧ ਭੁੱਲੀ ਹੁਣੀ ਫਿਰ ਪਤਾ ਨਾ ਰਹਿਣਾ ਕਿ ਮੂੰਹੋਂ ਕਿਹੜੀ ਗੱਲ ਨਿਕਲ ਗਈ ਆ ਕਿਹੜੀ ਕੱਢਣੀ ਤੇ ਫਿਰ ਬੇਵਾਗ ਬੰਦਿਆ ਮੇਰੇ ਵਰਗੇ ਜਿਹੜੇ ਨਹੀਂ ਇਨਾ ਗੈਰਤ ਮਨਾਗੇ ਕੋਰਾ ਸਲਾਹ ਕੀਤੀ ਆਖਣ ਲੱਗੇ ਆਈ ਛੋਟੇ ਲਿਆ ਕੇ ਰੱਖੋ ਤੇ ਜਿੰਨ ਲਤਾਂ ਭੰਨ ਛੱਡ ਕੇ ਇਹ ਚੰਗਾ ਮਸਤਾਨਾ ਹੁੰਦਾ ਏ ਇਹਨੂੰ ਆਪਣੇ ਆਪ ਦਾ ਪਤਾ ਹੀ ਨਹੀਂ ਐ ਕੀ ਗੱਲਾਂ ਕਰੀ ਜਾਂਦਾ ਮੂੰਹ ਚ ਬੈਠਿਆਂ ਬੈਠਿਆਂ ਸਰਦਪੁਰਾਂ ਦਾ ਸ਼ਬਦ ਪੜਿਆ ਬੜੋਸੇ ਵੇਲੇ ਤੜਫ ਕੇ ਡਿੱਗ ਪਏ ਉੱਥੇ ਲੇਟਣ ਗਿਆ ਖਾਂਡਾ ਵੇ ਉੱਚੀ ਉੱਚੀ ਕਿਲਕਾਂ ਮਾਰਨ ਦਾ ਵੇ ਫੇਰ ਆਖਣ ਦੇ ਬੈ ਸਾਨੂੰ ਫਟ ਕੇ ਛੁੱਟ ਗਿਆ ਜੇ ਤੂੰ ਤੁਰ ਜਾਣਾ ਹੀ ਸਾਨੂੰ ਪਟਣਾ ਨਹੀਂ ਤੇਰਾ ਵਰਗਾ ਕੋਈ ਹੈ ਨਹੀਂ ਹੋਰ ਜਿਹਨੂੰ ਐ ਕੇ ਜੂਲ ਕੇ ਤੂੰ ਸਾਡੇ ਕੋਲੋਂ ਕਿਹੜੇ ਲਿਆ ਆ ਬੱਸ ਫੇਰ ਕੇ ਤੇ ਫਿਰ ਹੋਰ ਗਲਾਂ ਕਰਨ ਮੂੰਹੋਂ ਕਰਨ ਦੇ ਇਹ ਜਿਹੜੇ ਨੀ ਜਾਣਦੇ ਇਹਨਾਂ ਆਖਿਆ ਦੂਸਰਿਆਂ ਨੂੰ ਵੱਡੋ ਛੋਟੇ ਇਹਨਾਂ ਨੇ ਲੱਤਾਂ ਬਾਹੀਂ ਪੰਨ ਛੱਡੀਏ ਏ ਮਗਰ ਮਗਰ ਗੌਰਿਆਂ ਦੇ ਮੇਲਿਆਂ ਦੇ ਤੁਰਿਆ ਫਿਰਦਾ ਨਾਲੇ ਜੋ ਗੱਲਾਂ ਕਰਦਾ ਸਤਿਗੁਰਾਂ ਨੂੰ ਅਜੇ ਆਂਦ ਲਈ ਆ ਤੇ ਸੰਧੀ ਜੀ ਸਾਹਿਬ ਸਤਿਗੁਰੂ RAM ਸਿੰਘ ਕਾਸ਼ਚੋਂ ਆਣ ਕੇ ਬੋਲਾ ਗੰਮੀ ਬੋਲਾ ਬੋਲਿਆ ਓ ਜੀ ਕੋ ਕਿਨੂੰ ਮਾਰਨ ਲੱਗੇ ਜੋ ਮੈਨੂੰ ਮਾਰਨ ਲੱਗੇ ਜੋ